ਮਾਰੂ ਵਾਰ ਮਹੱਲਾ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਰਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਕਾਈ ਗੁਣ ਵੇਚੀਐ ਜੇ ਗੁਣਾਂ ਦਾ ਵਪਾਰ ਕਰਨਾ ਹੋਵੇ ਤਾਂ ਗਾਹਕ ਚਾਹੀਦਾ ਜ਼ਰੂਰ ਜੇ ਗੁਰਬਾਨੀ ਦਾ ਗਿਆਨ ਦੇਣਾ ਹੋਵੇ ਗહન ਚਾਹੀਦਾ ਉਹ ਤਾਂ ਕਿਸੇ ਦੀ ਦੂਮੀ ਪੇਚਣ ਲੱਗਾਂ ਗਾਹ ਚਾਹੀਦਾ ਸਾਖਤ ਆਉਦੀ ਕੋਈ ਨਦੀ ਮੰਦਤ ਤੋਂ ਹੁਣ ਖੈਗੋ ਜਾਏ ਜ huzur ਚਲੇ ਜਾਂਦਾ ਰਹੋ ਉਹਦਾ ਅਸਰ ਨਹੀਂ ਹੁੰਦਾ ਉਹਨੂੰ ਜੇ ਸਾਖਤ ਮੂਰੇ ਨਾਲ ਕਰੀਏ ਨਾ ਸਾਖਤ ਨੂੰ ਤਾਂ ਐਸੇ ਸੱਚ ਕੋੜਾ ਲੱਗਦਾ ਇਹ ਕੋੜਾ ਲੱਗਦਾ ਗੁਰਬਾਨੀ ਦਾ ਗਿਆਨ ਹੋਵੇ ਜੇ ਜੀ ਆਪਾਂ ਨੂੰ ਕਲ ਕਲ ਦੀ ਲੋੜ ਉਹ ਵੇਚਣ ਦੀ ਲੋੜ ਨਹੀਂ ਐ ਜ਼ਰੂਰ ਚਲਾ ਜਾਂਦਾ ਹੈ ਭਾਏ ਕੋ ਦਾ ਜੇ ਮਿਲ ਜੇ ਜੀ ਨੂੰ ਉੱਠੀ ਕਰਕੇ ਜਿਹੜੀ ਗੱਲ ਉਹ ਕੱਲੇ ਕੱਲੇ ਗੱਲ ਨੂੰ ਕਹਿੰਦਾ ਆਹਾਂ ਲੱਖ ਰੁਪਏ ਦੀ ਗੱਲ ਕਰ ਫਿਰ ਨਾ ਖਾਂਦਾ ਗੁਣ ਤੇ ਗੁਣ ਮਿਲ ਪਾਈ ਜੇ ਸਤਗੁਰੂ ਮਾਹੇ ਸਮਾਈ ਅਸਲ ਗੁਣੀ ਤੇ ਗੁਣ ਮਿਲ ਪਾਈ ਲਿਖਣਾ ਚਾਹੀਦਾ ਸੀ ਇੱਕ ਨਾਣੇ ਨੂੰ ਪਛਾਈ ਗਈ ਸੀ ਕੁੜੀ ਕੋਈ ਗੁਣ ਨਧਾਨ ਹੋਵੇ ਕਿਸੇ ਕੋ ਗੁਣ ਹੋਣ ਉਹਨੂੰ ਮਿਲੀ ਤਾਂ ਉਹ ਤੋਂ ਪ੍ਰਾਪਤ ਹੋਣ ਕੋਈ ਜੇ ਕੋਈ ਕੁੜੀ ਵਿੱਚ ਬੇਗੁੜੀ ਦਾ ਨਾਮ ਰੱਖੇ ਫਿਰ ਉਸ ਗੁਣ ਮਿਲ ਜਾਂਦਾ ਜੇ ਪਈ ਹੈ ਵਿਲਾਪ ਨਾਲ ਬੇਗੁਣ ਜਦੋਂ ਕੁੜੀ ਹੋਵੇ ਕੋਈ ਉਹਦਾ ਨਿਲਾਪ ਹੋ ਜਵੇ ਫਿਰ ਗੁਣ ਮਿਲ ਜਾਂਦਾ ਜੇ ਸਤਗੁਰ ਨਾਲ ਮਾਣੇ ਸਮਾਇ ਉਹ ਜਿਹੜਾ ਕੁੜੀ ਹੁੰਦਾ ਉਹ ਸਤਗੁਰ ਨਾਲ ਵਿੱਚ ਆਪਣੇ ਮੂਲ ਵਿੱਚ ਸਮਾਇਆ ਹੋਣਾ ਚਾਹੀਦਾ ਜੋ ਸਤੌਰ ਮਾ ਹਣ ਸਮਾਏ ਸਤਗੋਲ ਦੇ ਵਿਚ ਆ ਸੁਭਾਇਆ ਹੁੰਦਾ ਤੋਨੂ ਸਤਗੋਲ ਨਾਲ ਜੋੜ ਦਿੰਦਾ ਹਾਂਜੀ ਮੋਲ ਅਮੋਲ ਨਾ ਪਾਈ ਐ ਵਣਜ ਨਾਲ ਲੀਜੇ ਹਾਟ ਬੋਲ ਅਮੋਲ ਅਮੋਲ ਗੋਲ ਨੇ ਜੜੇ ਅਮੋਲ ਗੋਲ ਨੇ ਇਹ ਗੋਲ ਨੇ ਮੋੜੇ ਮੜਦੇ ਬੋਲੀ ਬੋਲ ਨਾਲ ਉਹ ਨਾ ਪਾਈ ਐ ਅਮੋਲ ਮਸਤੂ ਬੋਲ ਰੋਲੀ ਮਣਦੀ ਹੁੰਦੀ ਵਣਜ ਨਾ ਲੀਜੇ ਹਾਟ ਨਾ ਤਾਂ ਤੋਂ ਇਹ ਦੁਕਾਨਾਂ ਤੋਂ ਮਿਲਦਾ ਨਹੀਂ ਕਿਹੜੀਆਂ ਦੁਕਾਨਾਂ ਨੇ ਨਾ ਮੁਰਦੇ ਆਹ ਦੁਕਾਨਾਂ ਹੀ ਨੇ ਚਲੋ ਜਿੰਨੀਆਂ ਵੀ ਧਰਮ ਦੀਆਂ ਦੁਕਾਨਾਂ ਚੋਂ ਨਹੀਂ ਮਿਲਦੇ ਕਿੱਥੇ ਦੁਕਾਨਦਾਰੀ ਹੈ ਕਿੱਥੇ ਤਰੁਕ ਦਾਬ ਰਿਆ ਹੋਇਆ ਹੈ ਜਿੱਥੇ ਗੋਲਕ ਪ੍ਰਧਾਨ ਹੈ ਜਿੱਥੇ ਇਹ ਆ ਵੀ ਸਾਡੀ ਤਾਂ ਵੀ ਗੋਲਕ ਘਟ ਗਈ ਆ ਜਿਹੜਾ ਪ੍ਰਚਾਰਕ ਇਹ ਗਲਤ ਪ੍ਰਚਾਰ ਕਰਦਾ ਜਿਹੜੀ ਗੱਲ ਨਾਲ ਗੋਲਕ ਭਰਦੀ ਆ ਉਹ ਚਾਹੇ ਚਾਹੇ ਜੀ ਵੀ ਉਹ ਠੀਕ ਹੈ ਜੇ ਠੀਕ ਪ੍ਰਚਾਰ ਨਾਲ ਗੋਲਕ ਘਟਦੀ ਆ ਤਾਂ ਪ੍ਰਚਾਰ ਠੀਕ ਹੈ ਉਹਨਾਂ ਨੂੰ ਪ੍ਰਚਾਰ ਨਹੀਂ ਕੋਈ ਮਤਲਬ ਨਹੀਂ ਉਹਨਾਂ ਨੂੰ ਗੋਲਕ ਸਹੀ ਮਤਲਬ ਹੈ ਇਹਨਾਂ ਨੂੰ ਗੋਲਕ ਤਾਂ ਹੀ ਮਤਲਬ ਹੈ ਉਹ ਧਰਮ ਦੀ ਧੰਦਾ ਹੈ ਉਹਨਾਂ ਦਾ ਉਹ ਦੁਕਾਨਾਂ ਸੰਗਤ ਆਊਗੀ ਕਬੂ ਨਾ ਹੋਵੇ ਘਾਟ 'ਚ ਘੱਟ ਵੱਧ ਨਹੀਂ ਹੋ ਸਕਦਾ ਫਸਲ ਨੂੰ ਵੀ ਤੋਲ ਮਨੋੜ ਕੇ ਬੋਲਿਆ ਜਾ ਸਕਦਾ ਉਹ ਕਹਿੰਦੇ ਨੇ ਤੋੜ-ਬਣੋੜ ਕੇ ਬੋਲੋ ਕੁਝ ਮਾਇਆ ਵਸ ਕਰਕੇ ਬੋਲੋ ਤਾਂ ਆਇਆ ਹੋਊਗੀ ਇੱਥੇ ਨਹੀਂ ਹੋ ਸਕਦਾ ਸੱਚ ਬੋਲ ਸੱਚ ਰਹੂਗਾ ਨਰੋਲ ਸੱਚੇ ਬੋਲੇ ਜਾਂਦੀ ਹੈ ਸਵਾਲ ਖੜਾ ਹੋਊ ਸਵਾਲ ਖੜਾ ਹੋ ਹਾਂਜੀ ਮਹੱਲਾ ਚੌਥਾ ਨਾਮ ਵਿਹੂਣੇ ਭਰਮਸੈਂ ਆਵੇਂ ਜਾਵੇਂ ਨੀਤ ਹਰਪ੍ਰੀਤ ਨਾ ਭਰਮ ਹੋਣੇ ਪਰਮ ਹੈ ਪਰਮ ਸੈਂ ਪਰਮ ਹੈ ਉਹਦਾ ਜਾਈਦਾ ਨਾ ਪਰਮ ਸੈਂ ਨੇ ਵੀ ਭਰਮ ਦੇ ਫਿਰਦੇ ਆ ਅਸਲ ਕਿਤੇ ਦੇ ਵਿੱਚ ਪਰਮ ਸੈਂ ਨਾਲ ਪੂਰਾ ਅਰਥ ਨਹੀਂ ਬਣਦੇ ਠੀਕ ਹੋ ਤਾਂ ਮੈਂ ਹੀ ਚਾਹੀਦਾ ਪਰਮ ਵਿੱਚ ਨਹੀਂ ਹੋ ਪਰਮ ਸੈਂ ਨਾਲ ਹੋਊਗਾ ਪਰਮ ਜਾਣਦੇ ਨੇ ਪਰ ਪੈਦਾ ਹੋ ਜਾਂਦਾ ਉਹਦੇ ਵਿੱਚ ਪਰ ਕਿ ਬਾਹਰ ਵਾਲਾ ਪਰਮ ਸੈਂ ਜੈ ਵੀ ਪਰਮ ਤਾਂ ਪਰ ਜਾਣ ਦਾ ਖਤਰਾ ਹੈ ਇਹ ਲੋਕ ਕੁਝ ਵੀ ਹੈ ਸੈਂਕੜੇ ਵਿੱਚ ਬਹੁਤਾ ਫਰਕ ਨਹੀਂ ਹੈ ਠੀਕ ਹੈ ਚਾਰ-ਪਾਰਾਂ ਦੀ ਕਿਤੇ ਉਲਟ ਕਰ ਦਈਏ ਇਹਦੇ ਵੀ ਕੋਈ ਖਿੰਦ ਵੀ ਗੱਲ ਜ਼ਰੂਰ ਹੈ ਇਹ ਪਰਮਾਤਮਾ ਹੋਏ ਤਾਂ ਚੰਗਾ ਹੈ ਹੋਏ ਨਹੀਂ ਭਰਮ ਸੈ ਨਾਲ ਪਰਮੇ ਹੋਏ ਦੇਹ ਅਰਥ ਵੀ ਵੰਡੋ ਨਾਮ ਵੀ ਹੁਣ ਰਹੇ ਗਏ ਦੇ ਵਿੱਚ ਫਸੇ ਹੋਏ ਨੇ ਨਾਮ ਵੀ ਹੁਣਾ ਹੈ ਨਾਮ ਤਾਂ ਖਾਲੀ ਨੇ ਬਿਲਕੁਲ ਠੀਕ ਹੈ ਨਾਮ ਵੀ ਹੋਣੇ ਪਰਮਸੈ ਆਵੇਂ ਜਾਵੇਂ ਨਹੀਂ ਇੱਕ ਬੰਦ ਇੱਕ ਢਿੱਲਿਆਂ ਇੱਕ ਸੁਖੀ ਹਰਪ੍ਰੀਤ ਇੱਕ ਸੁਖੀ ਇਹਨੇ ਢੇੜ ਨਹੀਂ ਖੁੱਲਦੇ ਨੇ ਤੋ ਕਿ ਉਹਨਾਂ ਜਿਹੜੇ ਖੁੱਲ ਗਏ ਉਹਨਾਂ ਦੀ ਹਲਣਾ ਪ੍ਰੀਤ ਜਿਹੜੇ ਬੰਦਰ ਮੁਕਤ ਨੇ ਉਹ ਸੁਖੀ ਇਹਨੇ ਹਲਣਾ ਪ੍ਰੀਤ ਆ ਇੱਕ ਕਿਹੜੇ ਬੰਨੇ ਹੋਏ ਨੇ ਆਇਆ ਜੇ ਬੰਦਨਾ ਚ ਨੇ ਅੱਜ ਪਜਤ ਬੰਨੇ ਨੇ ਅੱਜ ਪਜਤ ਢਿੱਲੇ ਨੇ ਗਿਆਨ ਆਇਆ ਦਾ ਪੂਰੀ ਢਿੱਲ ਵੀ ਪਈ ਹੋਈ ਹੈ ਢਿੱਲੇ ਬੰਨੇ ਹੋਏ ਨੇ ਨਾ ਢਿੱਲੇ ਨੇ ਖੋਲ ਸਕਦੇ ਨੇ ਰਾਬੀ ਆਰਾਮ ਨਾਲ ਨਿਕਲ ਸਕਦੇ ਨੇ ਅਲਮੁਸਲਾ ਉਹ ਤਾਂ ਡਿਪੈਂਡ ਕਰਦਾ ਹੈ ਉਹਨਾਂ ਦੇ ਗੁਰਬਾਣੀ ਦੀ ਸਮਝ ਆ ਗਈ ਉਹ ਢਿੱਲੇ ਨੇ ਢਿੱਲੇ ਤਾਂ ਕਰਤੇ ਬੰਨ ਮੁੰਦਰੀ ਦੀ ਗੱਲ ਯਾਰ ਬੋਰੀ ਦਾ ਮੂੰਹ ਖੋਲਤਾ। ਕਿ ਕਰਨਾ ਚਾਹੁੰਦੇ ਹੈ ਬੋਰੀ ਕੇ ਦੇ। ਕਿ ਕਿ ਕਰਨਾ ਚਾਹੁੰਦੇ। ਠੀਕ ਹੈ। ਹਾਂਜੀ। ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ। ਜੇ ਸੱਚੇ ਨੂੰ ਮੰਨ ਲੀਏ ਤਾਂ ਸੱਚ ਕਾਢੀ ਹੋ ਸੱਚਾ ਜਿਹੜਾ ਅੰਦਰ ਸੱਚਾ ਮਾਨਾਤਾ ਜੇ ਉਹਦੀ ਗੱਲ ਮੰਨ ਲੀਏ ਤਾਂ ਇਹਦੀ ਵੀ ਕਾਢੀ ਬਦਲ ਜੂ। ਉਹ ਯਾਰ ਮੰਦੀ ਵੀ ਕਾਢੀ ਬਦਲੂ ਸੱਚੀ। ਰੀਤ ਵੀ ਸੱਚੀ ਹੋ ਵਰਤਾਓ ਵੀ ਸੱਚਾ ਹੋ ਜੂਗਾ। ਵੀ ਸੱਚੀ ਹੋ ਸੋਚ ਵੀ ਸੱਚੀ ਹੋ ਜੂਗੀ ਜੋ ਸੋਚ ਦੇ ਮੁਤਾਬਕ ਕਰੂਗਾ ਪ੍ਰੈਕਟੀਕਲ ਕਰੂਗਾ ਉਹ ਵੀ ਪਤਾ ਸੱਚਾ ਸੱਚਾ ਆਚਾਰ ਵਿਚਾਰ ਕਰਕੇ ਸੱਚਾ ਸੱਚਾ ਹੋ ਜੂਗਾ ਗੁਰ ਤੇ ਗਿਆਨ ਪਾਇਆ ਅਤਖੜਗ ਕਰਾਰਾ ਦੂਜਾ ਭ੍ਰਮਗੜ ਕਟਿਆ ਮੋਹ ਲੋਭ ਅਹੰਕਾਰ ਉਹਦਾ ਜਿਹੜਾ ਗਿਆਨ ਪਾਇਆ ਉਹ ਹੀ ਅਤਖੜਗ ਕਰਾਰਾ ਉਹ ਕਰਾਰਾ ਉਹ بلندل اس طرح کئی سریلنگ لیے ان کڑلے کرارا بھی بلند ایتھ بیاگاں دے حساب نال کھڑگتا اسریل دی بودی تے پہلی لاگو ہوندی بیاگاں نال نہیں جڑی بیاگاں دی گل صاحب نو کہندا نہیں لاگو ہوندی اوہو اٹ کھڑگ کراتا نہیں ਜੇ ਉਹਦੇ ਅਰਥ ਮੰਨਾਂਗੇ ਤਾਂ ਆਪਸੇ ਆਲੇ ਫਿਰ ਦੂਈ ਤਲਵਾਰ ਰੋਈਵਾਂ ਜੀ ਠੀਕ ਹੈ ਕਰਾਰੇ ਤੋਂ ਭਾਵ ਕੀ ਹੈ ਜੀ ਮੈਨਾ ਸਖਤ ਜਿਹਦਾ ਵਾਰ ਖਾਲੀ ਨਹੀਂ ਦਾ ਗੜ ਚਾਹੀਦਾ ਣਕੇ ਦਾ ਕੋਟ ਕੀ ਕੋਟ ਵਾਲਾ ਲੈ ਪਹਿਲਾ ਸੀ ਦੂਜਾ ਪਰਮ ਗੜ ਜਿਹੜਾ ਉਹ ਲੋਭ ਹੰਕਾਰ ਕਾਰਨ ਸੀ ਜੀ ਹਾਂਜੀ ਹਰ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਮਤ ਉਤਮਾ ਹਰ ਲੱਗਾ ਪਿਆਰਾ ਹਰ ਕਾ ਨਾਮ ਬੋਲ ਵਸ ਗਿਆ ਗੁਰ ਸ਼ਬਦ ਵਿਚਾਰਾ ਜੇ ਦਾ ਗੁਰਪ੍ਰਦੇਸ ਦਾ ਸੱਚ ਸੰਜਮ ਮਤ ਉਤਮਾ ਹਰ ਲੱਗਾ ਪਿਆਰਾ ਕਰਨੀ ਹੋਦੀ ਹੈ ਕਰਨੀ ਹੋਦੀ ਹੈ ਉੱਤਮਾ ਬਾਤੋ ਤਮ ਹੋ ਗਈ ਮਤ ਬਦਲਦੀ ਚਲੀ ਗਈ ਬਾਤ ਨੂੰ ਥੋੜਾ ਥੋੜਾ ਕਰਕੇ ਮਨਔਰ ਬਾਤ ਜੋ ਬਦਲ ਗਈ ਦੋ ਮਿੰਟ ਸ਼ਬਦ ਵਿਚਾਰ ਕਰਕੇ ਹੋਇਆ ਸਭ ਹਾਂਜੀ ਹਾਂਜੀ ਸ਼ਬਦ ਵਿਚਾਰਿਆ ਸਮਝ ਆ ਗਈ ਕਿ ਮਾਇਆ ਜਿਹੜੀ ਝੂਠੀ ਲੱਗਣਾ ਸੀ ਸੱਚ ਨਾਲ ਪਿਆਰ ਲੱਗਣ ਲੱਗਿਆ ਸੱਚ ਨਾਲ ਮਾਇਆ ਨਾਲੋਂ ਸੀ ਝੂਠੀ ਨਾਲ ਉਹ ਛੱਡਣਾ ਲੱਗਿਆ ਸੱਚ ਨਾਲ ਪਿਆਰ ਵਧਾਣਾ ਲੱਗਿਆ ਠੀਕ ਹੈ ਜੀ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਇਹ ਜੋ ਵਰਤ ਰਿਹਾ ਹੈ ਉਹ ਸੱਚੋ ਸੱਚ ਹੈ ਸੱਚ ਸਿਰਜਣਹਾਰਾ ਸਿਰਜਣਹਾਰਾ ਹੀ ਸੱਚ ਹੈ ਜਿਹੜੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਤਾ ਸੱਚ ਆਪ ਹੈ ਸਿਰਜਣਾਂ ਦਾ ਕਲ ਵਾਲਾ ਸੱਚ ਹੈ ਦੂਜਾ ਤਾਂ ਕੋਈ ਹੈ ਹੀ ਨਹੀਂ ਆਪ ਹੀ ਉਹ ਆਪਿਆ ਲੱਗਦਾ ਹਾਂ ਜੀ ਇੱਥੇ ਸੱਚ ਆਪਣੇ ਮੂਲ ਵਾਸਤੇ ਆ ਰਿਹਾ ਜੀ ਆਪਣੇ ਸ਼ਬਦ ਗੁਰੂ ਵਾਸਤੇ ਆ ਰਿਹਾ ਸ਼ਬਦ ਗੁਰੂ ਵਾਸਤੇ ਨਹੀਂ ਆ ਰਿਹਾ ਜੀ ਜੀ ਸਤਿ ਸ਼ਾਨਜਕੂਰ ਜੋਤ ਸਹਿਜ ਰੂਪ ਬੁਬ ਜਿਹੜੇ ਹੋਏ ਨੇ ਸਹਿਜ ਸੱਸਾ ਸਭ ਜਿਹੜੇ ਸਹਿਜ ਹੋ ਪਾਇਆ ਉਦੋਂ ਹੁਕਮ ਉਹਨਾਂ ਦਾ ਹੀ ਹੁੰਦਾ ਕਿਸੇ ਦਾ ਹੁੰਦਾ ਹੁਕਮ ਯਕੀੜਾ ਹੁੰਦਾ ਹੈ ਪਰ ਹੁਕਮ ਜਿਹੜਾ ਹੁੰਦਾ ਹੈ ਜਦੋਂ ਹੋ ਜਾਂਦਾ ਹੈ ਉਹ ਪਾਰੇ ਜੀ ਦਾ ਹੁਕਮ ਇੱਛਾ ਸ਼ਕਤੀ ਹੁਕਮ ਜਿਹਦੀ ਇੱਛਾ ਜੋ ਸਧਾਰਨ ਸੱਚ ਹੈ ਹੁਕਮ ਉਸੇ ਸ਼ਾਲੀ ਦਾ ਹੈ ਇਸ ਕਰਕੇ ਹੁਣ ਉਹ ਦਾ ਤਰੀਕਾ ਸੋ ਉਹ ਦਾ ਗੋਪਤ ਪਰਟਟ ਹੋ ਜਾਂਦਾ ਹੈ ਇਸ ਕਰਕੇ ਸਾਖ ਨਹੀਂ ਹੁਕਮ ਸਾਖ ਜੋ ਤਾਂ ਸਾਖ ਜੋ ਤਾਂ ਸੱਚ ਸਿਰਜਣਹਾਰਾ ਕੌਣ ਸੱਚ ਵਰਤਦਾ ਹੈ ਨਾ ਫਿਰ ਜੀ ਸਿਰਜਣਾ ਦੀ ਪੈਦਾ ਕੀਤਾ ਹੋਇਆ ਸੱਚ ਦੇ ਅੰਦਰ ਇੱਛਾ ਪੈਦਾ ਹੋਈ ਹੈ ਇੱਛਾ ਹੁਕਮ ਹੈ ਜਿੱਤੇ ਜੀ ਦੀ ਇੱਛਾ ਹੁਕਮ ਹੈ ਇੱਛਾ ਦਾ ਉਹ ਹੈ ਜੋਤਿਸ ਭਾਵ ਹੈ ਭਾਰਾ ਕੀ ਹੈ ਜਿਹਨੂੰ ਭਾਰਾ ਹੈ ਉਹ ਸੱਚ ਹੈ ਉਹਦੀ ਇੱਛਾ ਸਾਜ ਛਬਰ ਇੱਛਾ ਸਾਜ ਸ਼ਬਦ ਹੈ ਉਹ ਬੰਨ ਸੱਚ ਉਹ ਆਵਾ ਜਿਹਦੀ ਇੱਛਾ ਉਹ ਵਾਸਤੇ ਆ ਰੇਕ ਵਾਸਤੇ ਲੋਕ ਵਾਸਤੇ ਆ ਰੇ ਪੂਰਨ ਜੋਤ ਵਾਸਤੇ ਆ ਰੇ ਸੱਚ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ